ਲੋਕ ਮਹੱਲਾ ਤੀਜਾ ਨਾਨਕ ਬਿਨ ਸਤਗੁਰ ਭੇਟੇ ਜਗ ਅੰਧ ਹੈ ਅੰਧੇ ਕਰਮ ਕਮਾਏ ਸ਼ਬਦੈ ਸਿਉ ਚਿਤਨਾ ਲਾਵਈ ਜਿਤ ਸੁਖ ਵਸੈ ਮਨ ਆਏ ਜੇ ਉੱਤੋਂ ਕਰ ਸ਼ੁਰੂ ਕੀਤੀ ਫਿਰ ਤੋਂ ਕਰ ਚੱਲੂਦੂ ਉੱਤੋਂ ਵੀ ਸਾਗੁਰ ਪੈਲੀ ਸੀ ਗੱਲ ਹਮਮ ਅੰਤਰਾ ਗੁਰ ਪੈਟਲੂ ਇਹ ਤਾਂ ਮਨ ਸਾਡੀ ਭਗਤੀ ਦੀ ਇੱਕ ਜਿੁੱਥੇ ਸੀ ਅੱਧੀ ਕਰਕੇ ਆ ਜੇ ਬੇਸਾਦ ਗੁਰੂ ਕੋਲ ਬੈਠੇ ਜਾ ਦਰ ਹੈ ਉਸ ਦੇ ਕਰਮ ਕੁਬਰੇ ਅੱਖਰ ਹੁਦੈ ਹੋਏ ਇਹਨੂੰ ਸੱਚ ਕਰਕੇ ਇਹ ਬੋਲਦਾ ਜਿੱਦ ਸੁਖ ਬਸਾਇਆ ਨਾ ਹੈ ਇਹ ਨਾਲ ਸੁਖ ਬੰਗਲਾ ਦੇ ਬਸਣਾ ਸੀ ਇਹ ਨੂੰ ਚਿਤ ਨਹੀਂ ਆਉਦਾ ਸੁਖ ਬਸਾ ਕੇ ਚਿਤ ਕਰਕੇ ਵਾਰੀ ਨੂੰ ਬੁਲਦੇ ਚਲ ਸੁਖੋ ਬੇ ਚਿਤ ਕਰਕੇ ਵਾਰੀ ਨੂੰ ਗਦ ਹਾਜੀ ਸ ਜਲਤ ਬਿਹਾਈ ਜੋ ਤਿਸ ਭਾਵੈ ਸੋ ਥੀਐ ਕਹਿਣਾ ਕਿਛੂ ਨਾ ਜਾਏ ਤਾਮਸ ਲੱਗਾ ਸਦਾ ਫਿਰੈ ਅੱਤ ਬੂੜ ਫਿਰਦਾ ਬਾਇਆ ਪਿੱਛੇ ਫਿਰਦਾ ਭਜਿਆ ਉਹਦੀ ਗੁਪਤਾਂ ਨਾਲ ਆ ਵੀ ਆਜਵੇਂ ਆ ਵੀ ਹੈ ਵਾਇਆ ਜੀ ਧੋਖ ਨੂੰ ਤਾਬੂਜ਼ ਕਰਦੇ। ਪਠਾਰ ਤੋਂ ਜੀ ਸਦਾਈ ਪਠਾਰ ਦੇ ਪਿੱਛੇ ਲੱਗਿਆ ਫਿਰਦਾ। ਜੇਲਾ ਅਬਦਰ ਤ੍ਰਿਸ਼ਦੇ ਜੀ ਗਲੀ ਜਲੜੇ। ਕਿਤਾਬ ਚ ਬੀਤਦੀ ਇਹ ਦੰਦ। ਕਿਤਾ ਚ ਰਹਿੰਦਾ। ਉਹ بگੜ ਗਿਆ, ਉਹ ਬਗਏ ਹੋ ਗਿਆ, ਉਹ ਐਜੀ ਹੋਇਆ। ਇਹ ਕਹਿ ਰਹਿੰਦਾ। ਜੋਤਿਸ ਪਾਬਾ ਸੋਕੀਏ, ਜੋਤਿਸ ਪਾ। ਕਹਿੰਦਾ ਸ਼ੁਕਰ ਜੀ। ਇਦੇ ਵਿੱਚ ਕੋਈ ਤਾਂ ਗਲਤੀ ਹੈ ਸਰਬ ਦਾ ਜੀਵ ਨੂੰ ਭੋਲਣਾ ਹੋਈ ਹੁੰਦਾ ਹੈ ਪਰਮੇਸ਼ਰ ਦੀ ਗਲਤੀ ਹੋ ਸਕਦੀ ਇੱਥੇ ਉਸ ਪਹਾੜ। ਗਲਤੀ ਪਰਮੇਸ਼ਰ ਦੀ ਹੋਗੀ। ਅੱਛਾ ਜੀ। ਉਹ ਇੱਥੇ ਜੇ ਆਪਾਂ ਕਹ ਲਈਏ ਜੋ ਉਸ ਹੈ ਉਹ ਪਰਮੇਸ਼ਰ ਉਸ ਭੋਲਦਾ ਹੁੰਦਾ ਫਿਰ ਤਾਂ ਗਲਤੀ ਪਰਮੇਸ਼ਰ ਦੀ ਹੈ। ਜੀਵ ਦੀ ਕੀ ਗਲਤੀ ਹੈ ਵਿਚਾਰੇ ਦੀ। ਹਾਂਜੀ ਇਹ ਤਾਂ ਫਿਰ ਚਲਾਇਆ ਚੱਲ ਰਿਹਾ ਇਹ ਜੋ ਇਹਦੀ ਇੱਛਾ ਹੈਦੀ ਇੱਛਾ ਤੇ ਗੱਲ ਖੜੀ ਹੈ ਜੀਵ ਦੀ ਇੱਛਾ ਤੇ ਜੇ ਤਾਂ ਚਿਤ ਕਰਕੇ ਮੰਨਦਾ ਗੁਰਬੰਦੀ ਨੂੰ ਫੇਟਾ ਹੁੰਦਾ ਖਦਾ ਸੁਖ ਅੱਛਾ ਜੀ ਜੇ ਨਹੀਂ ਮੰਨ ਫੇਟੂਂਗਾ ਨਾ ਆਪਸੇ ਤਬ ਉਹ ਕੋਟੇ ਦੂਏ ਪਾਸੇ ਆਉਂਦਾ ਗੁਰਬੰਦੀ ਨੂੰ ਬੁਲਾ ਫੇ ਸਤੋਵਰ ਜਾ ਜਾਂਦਾ ਸਤੋਵਰ ਦੇ ਵਿੱਚ ਸੁਖ ਹੈ ਸ਼ਾਂਤੀ ਹੈ ਦੋੜ ਦੋਖਾ ਅਗਰ ਬੇਟੀ ਜੋ ਬਿਮਾਰੀ ਹੈ ਆਏ ਇਹਦੇ ਤੇ ਕੀਤਾ ਕਾਨੂੰਨ लास्ट ਟਾਈਮ ਦੇ ਜੂ ਬਿਲਕੁਲ ਇਹ ਗਲਤੀ ਇਹ ਕਿੱਡੀ ਹੋਈ ਜੀ ਬਸ ਪਰਮਿਸ਼ਨ ਦੀ ਗਲਤੀ ਹੈ ਜੀ ਬਸ ਗਲਤੀ ਕੋਈ ਨਹੀਂ ਹੋਈ ਬੇਸ਼ਰੇ اونਜਾ ਕੋ ਇਸ ਲਾਹਰ ਦਾਸ ਕੋਦਨ ਕਹਿਣ ਹਾਂਜੀ ਇਹ ਮੈਂ ਆਪਰਾ ਅਰਥ ਬੋਲਦਾ ਇਸ ਸਰ ਆਪ ਤੋਂ ਐਸੇ ਲਫ਼ਜ਼ ਜਿਹਨਾਂ ਨੇ ਬੜਾ ਝਮੇਲਾ ਪਾਇਆ ਹੈ ਹਾਂਜੀ ਮਹੱਲਾ ਤੀਜਾ ਸਤਿਗੁਰੂ ਫਰਮਾਇਆ ਕਾਰੀ ਇਹ ਕਰਿਓ ਗੁਰਦੁਆਰੇ ਹੋਏ ਕੇ ਸਾਹਿਬ ਸੰਭਾਲਿਓ ਸਤਿਗੁਰੂ ਫਰਮਾਇਆ ਸ਼ਬਦ ਗੁਰੂ ਨੇ ਫਰਮਾਇਆ ਜੋ ਮੈਸੇਜ ਆਇਆ ਹੈ ਨਾ ਸੱਚਗੰਤ ਉਹਦੀ ਗੱਲ ਹੈ ਆਖਿ ਸਤਗੁਰੂ ਨਿਕਲੀ ਹੈ ਗੱਲ ਸਾਖ ਬੋਲ ਲਈ ਹੈ ਸਤਿਗੁਰੂ ਨੇ ਫਰਮਾਇਆ ਫਰਮਾਨ ਹੁਦਾ ਆ ਮੇਛੇ ਦਾ ਫਰਮਾਨ ਸਤਿਗੁਰੂ ਬਰਮਾਇਆ ਜਿਹੜੂ ਫਰਮਾਇਆ ਜਿਹੜਾ ਬੋਲ ਰਿਹਾ ਉਹਨੂੰ ਫਰਮਾਇਆ ਕਹਿੰਦਾ ਬੇਲੂ ਤਾਂ ਸਤਿਗੁਰੂ ਨੇ ਇਹਨਾਂ ਫਰਮਾਨ ਬੋਲ ਬੁਲਾਇਆ ਬੋਲਦਾ ਨੇ ਕਾਹੀਏ ਕਰਿਓ ਆ ਕਦ ਗਰੇ ਹੋ ਪਈ ਸਾਰੇ ਤੁਸੀਂ ਉਹ ਦਾਣ ਕਦਾ ਹੁਕਮ ਨਹੀਂ ਇਹ ਹੈ ਕਿ ਗੁਰੂ ਦਾ ਹੁਕਮ ਨਹੀਂ ਇਹ ਹੈ ਪਰਮੇਸ਼ਰ ਦਾ ਹੁਕਮ ਨਹੀਂ ਆ ਗਏ ਪਰਮੇਸ਼ਰ ਦੇ ਕੇ ਜਿਹੜਾ ਹੈਗਾ ਉਹ ਹੀਦਾ ਹੀ ਹੈ ਗੁਰਦੁਆਰ ਉਹ ਵੀ ਗੁਰਦੁਆਰ ਹੀ ਹੈ ਇੱਕ ਘੇਰ ਵਿੱਚ ਇੱਕੇ ਦੁਆਰੇ ਹੋਇਤਾ ਹੈ ਸਾਰ ਸੰਭਾਲ ਲਿਓ ਆਪਣਾ ਸਾਹਿਬ ਉਹਦੇ ਵਲ ਤਿਆਰ ਰੱਖਿਓ ਉਹ ਕੀ ਕਹਿੰਦਾ ਉਹਦੀ ਪਰਵਾਹ ਕਰਿਓ ਚੇਤਾ ਰੱਖਿਓ ਦਾ ਭਲਾ ਉਹਦੇ ਹੀ ਗੱਲ ਕਹੀ ਹੋਈ ਠੀਕ ਹੈ ਜੀ ਇਹਦਾ ਹਰ ਫਰਮਾਨ ਉਹਨੂੰ ਸੁਭਾਲ ਕੇ ਰੱਖਿਓ ਚਲੂ ਕੇ ਰੱਖਿਓ ਬੰਦ ਕਰ ਕਿਉਂ ਚੇਤ ਵਿੱਚ ਹਾਲਾਤ ਦਾ ਹਾਜ਼ਰ ਮਾਜ਼ਰ ਰੱਖਿਓ ਸੰਭਾਲ ਲਿਓ ਸਾਹਿਬ ਸਦਾ ਹਜ਼ੂਰ ਹੈ ਪਰਮੇ ਕੇ ਛੋੜ ਕੱਟ ਕੇ ਅੰਤਰ ਜੋਤਿ ਤੇ ਰਹੋ ਉਹ ਸੈਕ ਵੀ ਸਦਾ ਹਜੂਰ ਉਹ ਜਿੱਤਦਾ ਲਾਲ ਹੈ ਆ ਗੱਲ ਸਾਧਗੋਲ ਦਾ ਬਾਰੇ ਬੋਲਦੇ ਹੈ ਉਹ ਸਾਧਗੋਲ ਸਾਹਿਬ ਕਿਹਨੂੰ ਕਹਿੰਦੇ ਸਾਧਗੋਲ ਸਾਹਿਬ ਕਹਿੰਦੇ ਉਹ ਕਹਿੰਦਾ ਆਪਣੇ ਨਾਲ ਸੁਣਦਾ ਜੀ ਤੁਹਾਨੂੰ ਉਹ ਇਹਨੂੰ ਸੁਣਦਾ ਤੁਹਾਡੀ ਨਹੀਂ ਸੁਣਦਾ ਉਹ ਆਰਮਰ ਤਾਂ ਆਇਆ ਥੋੜੇ ਨਾਲ ਸਾਰੇ ਹਲਤੇ ਉਹ ਤੇ ਮੈਂ ਨਹੀਂ ਗੱਲ ਸਕਦੀ ਨਾਮ ਸਦਾ ਹਜੂਰ ਹੈ ਪਰਮੇਸ਼ਰ ਨਾਲ ਠੱਕ ਕੇ ਉਹ ਜੋਤ ਨੂੰ ਜਦ ਦਿਖਾ ਦਿੰਦਾ ਹੋ ਕਿ ਉਹਨੇ ਭੇਰੀ ਉਹਨੇ ਉਹਨੇ ਟਕੌੜੀ ਉਹ ਭੇਰੀ ਦਿਖਾ ਸਕਦਾ ਗੱਲ ਸਤਗੁਰ ਕਰ ਰਿਹਾ ਹੈ ਪਰ ਆਪ ਤੋਂ ਕਿਸੇ ਹੋਰ ਦੀ ਗੱਲ ਕਰ ਰਿਹਾ। ਦੇਖਣੇ ਉਧਰ ਗੁਰਬਾਣੀ ਜੀ ਕਿ ਬੋਲਦਾ ਕੋਣ ਹੈ। ਇਹ ਜੋ ਗੱਲੋਂ ਵੱਲੋਂ ਗੱਲ ਬੋਲੀ ਗਈ ਹੈ। ਫਿਰ ਸਾਨੂੰ ਪਤਾ ਲੱਗਦਾ ਵਾਸਤੇ ਕਹੀ ਜੇ ਤਾਂ ਆਪ ਤੋਂ ਉਧਰੇ ਨੂੰ ਕਹਿਣਾ ਪਰਮੇਸ਼ਰ ਨੂੰ ਕਹਿਣਾ ਜੇ ਆਪ ਤੋਂ ਥੱਲੇ ਆਣੇ ਨੂੰ ਕਹਿਣਾ ਬੋਲੂਗਾ ਇਹ। ਉਹ ਵਿਚਾਰੇ। ਸੀਟ ਹੈ ਆਪ ਤੋਂ ਥੱਲੇ ਆਇਆ ਕਹਿੰਦਾ ਆਪ ਤੋਂ ਉੱਪਰ ਆਈ ਦੀ ਗੱਲ ਕਰ ਰਿਹਾ। ਆਹ ਤੇ ਉਪਰ ਵਾਲੇ ਦੀ ਗੱਲ ਕਰ ਰਹੇ ਆ ਅਪਰ ਵਾਲੀ ਪਾਵਨ ਦੀ ਗੱਲ ਕਰ ਰਹੇ ਆ ਜੇ ਦੋ ਨੂੰ ਖੁਦ ਪ੍ਰਾਪਤੀ ਹੋ ਗੱਲ ਕਰ ਰਹੇ ਆ ਅੰਤਰ ਕੀ ਭਾਵ ਬਣਦਾ ਕੀ ਕਹਿਣਾ ਚਾਹੁੰਦੇ ਆ ਉਹ ਸਤਿਗੁਰੂ ਪ੍ਰਗਟ ਹੋ ਅੰਦਰ ਜੇ ਅੰਦਰ ਜਾਵੇ ਭੇਟੀ ਜੋ ਛੱਡ ਕੇ ਆਉਂਦੀ ਉਹਨੂੰ ਅੱਛਾ ਜੀ ਤੁਸੀਂ ਜੋਤ ਜਿਹੜੀ ਅੰਦਰ ਦਿਖਾਉਂਦੇ ਮੰਨ ਜੀ ਦਿਖਾਉਂਦੇ ਅੰਦਰ ਅਸੀਂ ਆਪਣਾ ਬੰਦੀ ਇੱਥੇ ਸੈਟ ਕਰ ਦਿੰਦੇ। ਜੋਤ ਮੰਨ ਵਾਸਤੇ ਵਰਤੂ ਜੋ ਸ਼ੁਰੂ ਕਰ। ਬੁੱਧੀ ਨੂੰ ਲੈ ਜੋ ਲੈ ਜੋ ਹੈ ਕੋਈ ਹੈ। ਨਾਮ ਅੰਮ੍ਰਿਤ ਹੈ, दारू ਇਹ ਲਾਇਓ, ਇਹ दारू ਲਾਇਓ, दारू ਇਸਤੇਮਾਲ ਕਰਿਓ ਇਹ ਹਰਕਾ ਨਾਮ ਬੋਲਦਾ। ਤੋ ਕਿ ਸੰਸਾਰ ਰੋਗੀ ਨਾਮ दारू। ਇਹ ਸਤਿਗੁਰ ਕਾ ਭਾਣਾ ਚਿੱਤ ਰੱਖੋ ਸੰਜਮ ਸੱਚਾ ਨੇਹੋ। ਤਦੋਂ ਨਾ ਪਾਣ ਦੇ ਚ ਰੱਖੋ ਜੋ ਚਾਹਦਾ ਉਹੀ ਹੋਊਗਾ ਤੁਹਾਡੇ ਕੀਤੇ ਕੁਝ ਨਹੀਂ ਹੋਣਾ ਤੇ ਬੁੱਧੀ ਨੂੰ ਬੁਝੂਲ ਖਾਚੇ ਨਾ ਕਰੋ ਬਾਹਰ ਬੁੱਧੀ ਨੂੰ ਟਿਕਾ ਲਓ ਬੁੱਧੀ ਸਰਬੱਹ ਦੀ ਤੇ ਲਖੇ ਹੋਗੀ ਰਹਾ ਹੈ ਮਾਸ਼ਾ ਦੇਖੋ ਤੁਸੀਂ ਇੱਧਰ ਰੱਖੋ ਸੰਜਵ ਸੱਚਾ ਬਿਓ ਬਸ ਇਹ ਤੇ ਜਿਵੇਂ ਆ ਨਾ ਕਰ ਲਾ ਕਬੀ ਆਲੋ ਨਾ ਕੀ ਕਰਕੇ ਬੰਦੂ ਇਹਦੇ ਨਾਲ ਪਿਆਰ ਰੱਖੋ ਨਾਲ ਪਰ ਇਹ ਜੋ ਹੋਇਆ ਸਾਡੇ ਫਾਇਦੇ ਚ ਹੋਇਆ ਜੇ ਬੜਾ ਹੀ ਪਰ ਲੋਕ ਬੰਦੇ ਸਮਝੇ ਜਗਾਲੂ ਹਾਂਜੀ ਹਾਲਾਤ ਬਦਲੇ ਤਾਂ ਬੁਰੇ ਹੋ ਗਏ ਨਹੀਂ ਸਮਝੇ ਲੋਕ ਠੀਕ ਹੈ ਜੀ ਹਾਂਜੀ ਨਾਨਕ ਇੱਥੇ ਸੁੱਖ ਹੈ ਅੰਦਰ ਰੱਖ ਸੀ ਅੱਗੇ ਹਰਸਿਓਂ ਕੇਲ ਕਰੇਂ ਗੱਲ ਕਹਦਾ ਸੰਸਾਰ ਦੇ ਵਿੱਚ ਸੁਖਾਂ ਦੇ ਅੰਦਰ ਰੱਖੂਗਾ ਤੁਹਾਨੂੰ ਐ ਤਤੀ ਤਵੀ ਤੇ ਵੀ ਬੈਠੀ ਹੋ ਤੁਹਾਨੂੰ ਬੁਲੋ ਜੋ ਤੂੰ ਤੇ ਬਸ ਦੀ ਗੱਲ ਹੀ ਹੈ ਇਹ ਕਿਰਪਾ ਦੀ ਗੱਲ ਹੈ ਸਾਕੋ ਮੇਰੇ ਬਾਲਾ ਸਾਕਾ ਮੈਂ ਸਦਾ ਤੁੱਖੇ ਅੰਦਰ ਰੱਖ ਸੀ ਅੱਗੇ ਹਰਸਿਓ ਕੇ ਕਰਿਓ ਅੱਗੇ ਦਾ ਚਿੰਤਾ ਹੀ ਕੋਈ ਨਹੀਂ ਇੱਥੇ ਇੱਥੇ ਜਿਹਨਾਂ ਦਾ ਸਰੀਰ ਹੈ ਇੱਥੇ ਇੱਥੇ ਖਤਰਾ ਹੈ ਜਿਹਨਾਂ ਦੇ ਸੁਭਦ ਦੇ ਵਿਚਾਰ ਕਿਸੇ ਹੋਰ ਦਾ ਰੱਖ ਸੀ ਅੱਗੇ ਹਰਸਿਓ ਕੇਲ ਕਰਿਓ ਉੰਦੇ ਦਾ ਹਰੇ ਹਾਰੇ ਦਾ ਜੋਤੇ ਜੋਤ ਅੱਗੇ ਤਾਂ ਕੋਈ ਨਹੀਂ ਗੇਲ ਕਰਿਓ ਪੰਡਾ ਸਭ ਤੇਰੇ ਵਰਗੇ ਹੀ ਨੇ ਕੋਈ ਰੂਪ ਨੇ ਕੋਈ ਰੰਗ ਹੈ ਇੱਕੋ ਬਰਾਬਰ ਹੀ ਹੈ ਕੋਈ ਉੱਚਾ ਦੀਚਾ ਨਹੀਂ ਸਭ ਬਰਾਬਰ ਨੇ ਚਾਹੇ ਕਿਸੇ ਨੇ ਪਾਣੀ ਥੋੜੀ ਲਿਖੀ ਹੈ ਚਾਹੇ ਕਿਸੇ ਨੇ ਪਾਣੀ ਜ਼ਿਆਦਾ ਲਿਖੀ ਹੈ ਜਿਹੜਾ ਪਾਰ ਹੋ ਗਿਆ ਜੀ ਸੱਜਣੇ ਸਭ ਬਰਾਬਰ ਉੱਥੇ ਜਾ ਕੇ ਸਾਰੇ ਪਰਦੇ ਚੱਕੇ ਜਾਂਦੇ ਜਿਹੜੇ ਪਰਦੇ ਨੇ ਪਰਦੇ ਤਾਂ ਪਹਿਲੇ ਹੀ ਚੱਕੇ ਜਾਂਦੇ ਨੇ ਦੇ ਪਰਦੇ ਪਹਿਲੇ ਹੀ ਚੱਕੇ ਜਾਂਦੇ ਨੇ जी हां जी पौड़ी आपे पार 18 बनस्पत आप ही फल लाए आपे माली आप सब सिंचै आप पे ही मुँह पाए ओ दे पार 18 जेड़े बणाये दे तू आपे जीव है सब दे विच तू हैगा आत्मो दे बिना कुछ नहीं हो सकदा फाकी थोड़े माली फाकी फाकी जियो ਸਾਚੀ ਗੱਲ ਖਤਮ ਹੋ ਗਈ ਇੱਥੇ ਆਹੜਾ ਨਾਲ ਨਾਲ ਸਾਡੇ ਬਣਾਦੇ ਇੱਕ ਇੱਕ ਪੱਤਾ ਸੁੱਕਿਆ ਸੀ ਪਾਲਾ ਬਣਾਦੇ ਉਹ ਨਸਬਦੀ ਦੀ ਗਲਤੀ ਕੀਤੀ ਇਹ ਲੋਲੇ ਉਹ ਕਹਿੰਦੇ ਵੀ પતિ ਪਤੀ ਜਿਉ ਹੈ ਜਿਉ ਤੇ ਬਨ ਨਸਬਦੀ ਕਹਿਦੇ ਹੋ ਚੁੱਕੀ ਹਾਂਜੀ ਆਪੇ ਹੀ ਫਲ ਲਾਇਆ ਫਲ ਵੀ ਆਪੇ ਲੱਗਦਾ ਜਦ ਜ ਤੂੰ ਬੈਠਿਆ ਫਲ ਲੱਗਦਾ ਜਾਂ ਸੁੱਕ ਗਿਆ ਪੱਤੇ ਸੁੱਕ ਜਾਂਦੇ ਸਭ ਕੁਝ ਸੁੱਕ ਜਾਂਦਾ ਜੇ ਜੀਬ ਵਿੱਚ ਬੜਿਆ ਰਾਇ ਫੁੱਲ ਵੀ ਲੱਗਦੇ ਨੇ ਫਲ ਵੀ ਬਣ ਜਾਂਦੇ ਨੇ ਅੱਛਾ ਜੀ ਆਪੇ ਮਾਲੀ ਆਪ ਸਭ ਸਿੰਚੇ ਆਪੇ ਹੀ ਮੁਹ ਪਾਈ ਆਪੇ ਮਾਲੀ ਦੇ ਵਿੱਚ ਵੀ ਉਹੀ ਆਤਮਾ ਬਦਲੋਦੀ ਵਿੱਚ ਵੀ ਉਹੀ ਆਤਮਾ ਜਿਜਣ ਵੀ ਉਹੀ ਆਤਮਾ ਖਾਣ ਵਾਲੇ ਦੀ ਵੀ ਉਹੀ ਆਤਮਾ ਤੋਰੀ ਹੈ ਇੱਕੋ ਹੀ ਹੈ ਤੂੰ ਦੇਖੋ ਇੱਕ ਕਰਤਾ ਹੁੰਦਾ ਸਭ ਕੁਝ ਸਾਬੇ ਕਰਤੀ ਆਤਮਾ ਸਾਬੇ ਜੋਤ ਜੋਤ ਹੈ कोई ठीक है ए तो फिर माल आपे सिंचा ताए दो कम हो रहे हैं एक ता ओदी पालना हो रही है फिर श्रृंगार हो रहे हैं जी, आपे ही पाए हां मुंह आपे करता आपे भुक्ता आपे दे दीवाय आपे साहेब आपे है रखा आपे रहया ਆਪੇ ਕਰਤਾ ਆਪੇ ਭੋਗਦਾ ਉਹ ਹੀ ਕਰਤਾ ਭੋਗਦਾ ਆਪੇ ਆ ਗਿਆ ਉਹਨੇ ਕਰਤਾ ਹੋਰ ਹੈ ਭੋਗਦਾ ਹੋਰ ਹੈ ਹਾਂਜੀ ਉਹ ਪੜਾਈ ਫਰਤੀ ਹੈ ਹੈ ਆਪੇ ਦੇ ਦਾਲ ਕਹਿੰਦੇ ਆ ਕਿਸੇ ਦੇ ਥਰੂ ਦੋਲਦਾ ਗੱਦਾ ਦਾਤਾ ਉਹੀ ਹੈ ਉਹ ਕਿਸੇ ਦੇ ਤਰੂ ਦੋ ਅੰਗਰੇਜ਼ ਜਦਨਾਰ ਮਾਦੀ ਪੱਠੇ ਪਾਉਂਦੇ ਆ ਅਸੀਂ ਥੋੜੀ ਪਾਉਂਦੇ ਆ ਅਸੀਂ ਤਾਂ ਪਾਏ ਹੋਏ ਪਾਉਂਦੇ ਜੇ ਹੈਗੇ ਨੇ ਪੱਠੇ ਤਾਂ ਪਾਉਂਦੇ ਜੇ ਪੱਠੇ ਹੀ ਨਾ ਹੁੰਦੇ ਤਾਂ ਪਾਉਂਦੇ ਪਾਣੀ ਬਣਾਉਂਦੇ ਪਾਣੀ ਹੈਗਾ ਬਣਾਇਆ ਤਾਂ ਅਸੀਂ ਨਹੀਂ ਬਣਾਉਂਦੇ ਦਵਾਏ ਸਾਤੇ ਦਵਾਈ ਉਹ ਦਿੱਤਾ ਹੋਇਆ ਦਾ ਠੀਕ ਹੈ ਜੀ ਇਹ ਕਹਿੰਦਾ ਮਤਲਬ ਜਿਹੜੀ ਉਹਨਾਂ ਨੇ ਤਿੰਨ ਦੇਵਤੇ ਉਹ ਖੰਡਤ ਹੈ ਇੱਥੇ ਬਾਸ ਬਾਸ ਬਾਸ ਉਹ ਕਰਨੇ ਉਹਨਾਂ ਦਾ ਕੋਸ਼ਿਸ਼ ਆਪੇ ਸਾਹਿਬ ਆਪੇ ਹੈ ਰਾਖਾ ਆਪੇ ਰਿਹਾ ਸਮਾਈ ਆਪੇ ਸਾਹਿਬ ਆਪੇ ਰੱਖਾ ਇੱਥੇ ਵੀ ਤਿਰਨ ਵਾਲੀ ਉਹ ਫਿਰਨਤ ਹੈ ਇੱਥੇ ਰਾਖਾ ਲਈ ਕਮਾਨ ਵਾਲਾ ਇੱਥੇ ਆਪੇ ਸ਼ਬਦ ਹੋ ਕੇ ਸਾਰੇ ਹੋ ਹੋਇਆ ਜੀਵ ਵਸਤੂ ਜਿਸ ਸਮਾਇਆ ਹੋਇਆ ਹੈ ਰੂਪ ਦੇ ਵਿੱਚ ਹਾਂਜੀ ਕਰਨ ਵਾਲਾ ਸ਼ਬਦ ਹੁਕਮ ਕਰਾਉਣ ਉਹ ਸਿਰਜਣ ਹਾਲ ਹੈ ਇਹ ਰਚਨ ਹਾਲ ਹੈ ਠੀਕ ਹੈ ਜੀ ਤੇ ਆਪੇ ਸਾਹਿਬ ਆਪੇ ਹੈ ਰੱਖਾ ਇਹ ਫਿਰ ਪਰਮੇਸ਼ਰ ਦੀ ਆ ਨਹੀਂ ਤਾਂ ਬਲੇਖਾ ਇਹ ਸਾਧੂਰ ਕਹਿੰਦਾ ਆਪੇ ਰੱਖਾ ਹੈ ਆਪੇ ਬਾਲਕ ਹੈ ਹਮਮ ਪਰ ਬੁਰਿਆ ਦੇ ਲੋਕ ਨਹੀਂ ਬੋਲਦੇ ਇਹ ਗੱਲ ਠੀਕ ਹੈ ਜੀ ਉਹਦੇ ਦਾਸ ਜਿਹੜਾ ब्रह्मा विदेश दाख दे और आपरे ਆਪੇ वापे रखा आपरे रेस बले क्या नार क बड़ाई आखे हर करते की जिसु कल ना तवारे सवार दी भूख फेर दी दिल किन्नी भी तवारा ਪਕਾ ਜੀਉਰੀ ਨੀ ਤੁਹਾਨੂੰ ਕੁਝ ਨਹੀਂ ਕਹਦਾ ਹਾਲ ਕੋ ਹੈ ਇੱਥੇ ਹਰ ਕਰਤਾ ਜਿਹੜਾ ਹੈਗਾ ਪਰਮੇਸ਼ਰ ਹੈ ਇਹ ਆਪ ਆਪ ਕਰਦੇ ਬਣਦੇ ਹੋਇਆ ਤੇ ਜਿਹਦੇ ਫਟਿਆ ਨਾਲ ਕਰ ਕਰ ਬਣ ਗਿਆ ਹੋਇਆ ਸਾਹਿਬ ਜੀ ਕਹਿੰਦੇ ਕਿ ਝਗੜਾ ਆ ਗਿਆ ਠੀਕ ਹੈ ਜੀ ਇੱਥੇ 15ਵੀਂ ਪੌੜੀ ਸਮਾਪਤੀ ਹੈ